ਸ਼ਲੋਕ ਮਹੱਲਾ ਚੋਥਾ ਇਹ ਮਨ ਨੂੰ ਆ ਗ੍ਰਿੜ ਕਰ ਰੱਖੀ ਹੈ ਗੁਰਮੁਖੀ ਲਾਈਏ ਚਿੱਤ ਕਿਉ ਸਾਸ ਗਰਾਸ ਵਿਸਾਰੀਐ ਬਹਦਿਆਂ ਉੱਠਦਿਆਂ ਨਿਤ ਜੇਲਾ ਬੋਧ ਨੂੰ ਦੜ ਕਰਕੇ ਮਜ਼ਬੂਤ ਕਰਕੇ ਰੱਖਣਾ ਚਾਹੀਦਾ ਪੱਕਾ ਕਰਕੇ ਰੱਖਣਾ ਚਾਹੀਦਾ ਨਾ ਸੁਭਾ ਕੇ ਭੁੱਲ ਭੁੱਲ ਜਾਂਦਾ ਜੇ ਕੀ ਕਹ ਰੇ ਗੱਲ ਹੁਣ ਬਖੇ ਲਾਈਏ ਚਿੱਤ ਫੇਰ ਜਿਤਨੇ ਨਾਲ ਜੋੜ ਕੇ ਰੱਖੀਏ ਜਿਤਨੇ ਨਾਲ ਜੋੜ ਕੇ ਰੱਖੀਏ ਜਿਤਨ ਨਾਲ ਚਿਤ ਤੋਂ ਅਟਲ ਰਹਦਾ ਹੈ ਸਭ ਆਏਗਾ ਟੱਹ ਲੈਣ ਸਾਸ ਗਰਾਸ ਵਿਚਾਰੀਏ ਨੂੰ ਸਾਸ ਰਸਾਰ ਹੀ ਸਾਸ ਗਰਾਸ ਹਾਂਜੀ ਤਕਰੀ ਦੀ ਬਿੱਸ ਦਸਾਣਾ ਚਾਹੀਦਾ ਹੈ। ਦਹ ਦੇ ਹੁੜਦੇ ਆਣ ਦਿੱਤ। ਹੁੜਦੇ ਆ ਆਪਣੇ ਦੁਨੀਆਂ ਨਾਲ ਜੁੜਿਆ ਰਹਿਣਾ ਚਾਹੀਦਾ ਚਿੱਤ ਨੂੰ। ਬੋਲ। ਬੋਲ। ਇੱਕ ਕਰੇ ਇੱਕ ਕਰਣਾ ਚਾਹੀਦਾ ਮਰਨ ਜੀਵਨ ਕੀ ਚਿੰਤਾ ਗਈ ਇਹ ਜੀੜਾ ਹਰ ਪ੍ਰਭ ਵਸ ਜਿਉ ਭਾਵੈ ਤਿਉ ਰਖ ਤੂੰ ਜਨ ਨਾਨਕ ਨਾਮ ਬਖਸ਼ ਮਰਨ ਜੀਵਨ ਦੀ ਕਿਰਤਾ ਫੇਜ ਜਾਂਦੀ ਹੈ ਮਰਨ ਜੀਵਨ ਦੀ ਕਿਰਤਾ ਉਹ ਨਾ ਨਹੀਂ ਜਾਂਦੀ ਜਦੋਂ ਜਦ ਸਾਹ ਕਰਾਸ ਜੁੜਦਾ ਨਹੀਂ ਹੈ ਜਿਸ ਤਨ ਮਰਨ ਜੀਵਨ ਦੀ ਕਿਰਤਾ ਚਲੀ ਗਈ ਇਹ ਜਿਹੜਾ ਹਰਪ੍ਰਭ ਵਸ ਜਿਹੜੇ ਨੂੰ ਜਿਹੜਾ ਜਿਹੜਾ ਹਰਪ੍ਰਭ ਦੇ ਵਸ ਨੀ ਕਰਦੇ ਉਹਨਾਂ ਚਿਰ ਦਿੱਤਾ ਬਣੀ ਰਹਦੀ ਹੈ ਕੇਵਨਾ ਜੁੜਿਆ ਹੋਇਆ ਹੈ ਚੇਤਨਣ ਜਿਹੜਾ ਹਰਪ੍ਰਭ ਵਸ ਹੈ ਜੇ ਜੁੜਿਆ ਨਹੀਂ ਹੋਇਆ ਤਾਂ ਹੈ ਉਹ ਖਰਾ ਹੈ ਜੀਵ ਭਾਵੈ ਤੂੰ ਰੱਖ ਤੂੰ ਜਨ ਨਾਨਕ ਨਾਮ ਬਖਸ਼ਿ ਪ੍ਰਭੇਸ਼ਰ ਜਿਬਸਰੀ ਇਚ ਰਖਤਾ ਤੂੰ ਪਰ ਵੇਚਾ ਹੈ ਰਹਿਣ ਦੀ। ਕਿਹਨ ਕਿਹ ਰਹਿਣ ਦੀ ਹੈ ਜਬਰ ਤੋਂ ਬਾਹਰ ਰਹਿਣ ਦੀ ਹੈ। ਬਖਸ਼ੇਛੇ ਹੀ ਕਰ ਤੂੰ। ਮੈਂ ਹੋਰ ਜਬਰ ਤੋਂ ਬਾਹਰ ਰੱਖ। ਤੇਰੀ ਬਖਸ਼ੇਛਾ ਦੇ ਤੇ। ਮੇਰਾ ਹਾਰ ਹੈ ਤੇਰੀ ਬੱਦੀ। ਤੁਬ ਤੀਜਾ ਗੀਵੂ ਬਹਾਰਾ ਸਚ ਨਾਉ ਬਖਸ਼ ਬੈਲੂ ਜਿਹਦੇ ਨੋਦ ਹੈ ਜਨਮਨ ਕਾ ਕਹਿ ਰਹੇ ਮਹੱਲਾ ਤੀਜਾ ਮਨਮੁਖ ਅਹੰਕਾਰੀ ਮਹਿਲ ਨ ਜਾਣੈ ਕਿਨ ਆਗੇ ਕਿਨ ਪਿਛੇ ਮਹਿਲ ਨ ਆਵੈ ਕਿਉ ਕਰ ਦਰਗਾ ਸਿਜੈ ਮਨਮੁਖ ਅਹੰਕਾਰੀ ਆਹਣ ਪਤਾ ਹੀ ਨਹੀਂ ਪਰ ਬਚਿਆ ਜਾ ਸਕਦਾ ਮੌਤ ਤੋਂ ਸਰੀਰ ਤੇ ਬਿਨ ਰੂਹ ਵੀ ਜੀਵਨ ਲੈ ਸਕਦਾ ਜੀਵਨ ਦਾ ਰੂਪ ਹੈ ਜੀਵਨ ਦਾ ਰੂਪ ਸਰੀਰ ਹੈ ਜੀਵਨ ਰੂਪ ਹੈ ਜੀਵਨ ਸਰੀਰ ਤੇ ਬਿਨ ਵੀ ਹੈ ਉਹਨੂੰ ਕੋਕ ਜੀਵਨ ਚੱਲਦਾ ਰਹਿੰਦਾ ਬਿਨਾਂ ਸਰੀਰ ਤੇ ਵੀ शरीर नहीं चलता मनो जी करते ये गल दी दुखां पाई सब नहीं ठीक है जी बोल मैं आज तारे मेहनत बाहना जान दी तो महल ही जानदा हां हल लफ है बुब्बा लगे ਗੋਹਲ ਲਗਾਏ ਦੋਦੂ ਕਿਧਾ ਹੱਗਾ ਕਰਨ ਪਿੱਛੇ ਇਸ ਕਰਕੇ ਖੱਟ ਜੱਗੇ ਹੋ ਜਾਂਦਾ ਖੱਟ ਪਿੱਛੇ ਹੋ ਜਾਂਦਾ ਵੀ ਅਡੋਲਤਾ ਦੀ ਜੇ ਅਡੋਲਤਾ ਦੀ ਜੇ ਉਹ ਪ੍ਰਕਿਰਿਆ ਦੀ ਅਡੋਲਤਾ ਦੀ ਸਭ ਜਾ ਜਵੇ ਤਾਂ ਫਿਰ ਹੋ ਜਵੇ ਅਡੋਲਤਾ ਦੀ ਸਭ ਕੀ ਨਹੀਂ ਹੈ ਆਪੇ ਗੋਹਲ ਹੈ ਆਪੇ ਮਿਲਣੇ ਲਤਾ ਦੀ ਕਿਛ ਦੇਵਤਾ ਉਹ ਸਬੂਤ ਦਾ ਮਹਲ ਕੋਈ ਹੋਰ ਚੀਜ਼ ਹੈ ਜਿੱਥੇ ਵੀ ਜਾ ਕੇ ਬਹਿ ਜਾਣ ਇਹ ਆਪੇ ਬੁੱਧਰ ਹੈ ਆਪੇ ਮਹਲ ਵੰਦੇ ਤੇ ਬੁੱਲ ਬੁੱਧਰ ਹੈ ਅਲੋ ਲੋਕ ਮਹਲ ਵਾ ਜਾਣ ਹਾਂਜੀ ਤੀਕੇ ਸਦਾ ਬੁਲਾਈਏ ਮਹਿਲ ਨਾ ਆਵੇ ਕਿਉਂ ਕਰ ਦਰਗਾ ਸਿੱਜੇ ਸਦਾ ਬੁਲਾਈਏ ਮਹਾਨ ਆਵੇ ਹਮੇਸ਼ਾ ਬੁਲਾਉਂਦੇ ਰਹੋ ਮਹਾਨ ਜੀ ਉਦਾ ਇਹ ਅਡੋਲਤਾ ਦੇ ਘਰ ਚ ਜੀਉਦਾ ਹੈ ਕਿ ਚੇਤਨਾਂ ਜੁੜ ਜੂਵੇ ਜਦ ਚੇਤ ਦੇ ਘਰ ਚ ਦਰਗਾਹ ਕਹਿੰਦੇ ਕਿ ਦਰਗਾਹ ਦੀ ਸੁਭਿਤੀ ਕੰਮੇ ਆਵੇ। ਇਹ ਤਾਂ ਦਰਗਾਹ ਜੇ ਤੇ ਬੁਲਾਇਆ। ਠੀਕ ਹੈ। ਆਪਣੇ ਆਪ ਨੂੰ ਕਦੋਂ ਪਤਾ ਲੱਗੇ ਨਗ ਜਵੇ ਦਰਗਾਹ ਕੀ ਹੈ। ਆਪਣੇ ਆਪ ਦਰਗਾਹ ਦਾ ਕਦੋਂ ਪਤਾ ਲੱਗੇ ਇਹ ਤਾਂ ਦਰਗਾਹ ਜੇ ਤੇ ਬੁਲਾਇਆ ਹੋਈ ਦਰਗਾਹ। ਕੋਈ ਸਭੁਤਾ ਦਰਗਾਹ ਨੂੰ ਅਸੇ ਜਾਣੇ ਤੁਮ ਤਹ ਹੋਰਨ ਕਾ ਮਹਿਲ ਵਿਦਲਾ ਰਹੇ ਕਰ ਜੋੜ। ਆਪਣੀ ਕਿਰਪਾ ਕਰੇ ਹਰ ਮੇਰਾ ਨਾਨਕ ਲੈ ਬਹੋੜ ਸਤਿਗੁਰ ਕਾ ਬਿਲਾਇਆ ਉਹਨੂੰ ਕੋ ਵਿਰਲਾ ਜਾਣਦਾ ਸਦਾ ਰਹਿ ਕਰ ਜੋੜ ਤੇ ਜਾਣਦਾ ਸਦਾ ਹੀ ਬੰਦੀ ਕਿਚਿਤ ਹੋ ਕੇ ਰਹਦਾ ਕਰ ਜੋੜ ਦਾ ਮਤਲਬ ਹੈ ਇੱਕ ਹੋ ਕੇ ਰਹਿਣਾ ਤੁਰ ਕਰ ਜੋੜ ਕਰੂੰ ਅਰਦਾਸ ਇੱਕ ਬੰਦੇ ਕਿਚਿਤ ਜੋੜ ਰਹਾ ਦੋਇ ਕਰ ਜੋੜ ਠੀਕ ਹੈ ਆਪਣੀ ਕਿਰਪਾ ਕਰੇ ਯਾਰ ਮੇਰਾ ਦੁੱਖ ਲੈ ਬੋਹਣ ਜਦ ਥਾਰੇ ਮੇਰਾ ਕਿਰਪਾ ਕਰਦਾ ਆਪਣ ਤਾਹੂ ਬੁਲਾ ਲੈਂਦਾ ਬੋਹਣ ਲੈਂਦਾ ਬਾਪ ਕਰ ਸੀ ਬੁਲਾ ਲੈਂਦਾ ਪੌੜੀ ਤਾ ਸੇਵਾ ਕੀਤੀ ਸਫਲ ਹੈ ਜਿਤ ਸਤਗੁਰ ਕਾ ਮਨ ਮੰਨੇ ਜਾ ਸਤਗੁਰ ਕਾ ਮਨ ਮੰਨਿਆ ਤਾਂ ਪਾਪ ਦੀ ਸੇਵਾ ਐਸੀ ਸੇਵਾ ਸਤਗੁਰ ਦੀ ਸੇਵਾ ਆਪਣੀ ਮੱਜੀ ਦੀ ਸੇਵਾ ਸੇਵਾ ਸਤਗੁਰ ਦੀ ਇਸ ਤਰੀਕੇ ਨਾਲ ਸੇਵਾ ਕਰੇ ਜਿਸ ਤਰੀਕੇ ਨਾਲ ਸਤਗੁਰ ਚਾਹੁੰਦਾ ਹੋਵੇ ਜੇ ਦਾ ਬੰਦ ਬੰਦੇ ਸੇਵਾ ਨੂੰ ਹਾਂ ਇਹ ਸੇਵਾ ਠੀਕ ਹੈ ਜਿਹੜੇ ਪਾਪ ਜੀ ਕੋ ਸਭੂਲ ਦੇ ਜਿਹੜੇ ਕਲਪਣਾ ਦੇ ਪਾਪ ਸੀ ਰਸਾਂ ਰਸਾਂ ਦੇ ਪਾਪ ਸੀ 81 ਤਾਂ ਪੀੜ ਦੇ ਇੱਛਾਾਂ ਸੀ ਤਾਂ ਪੀੜ ਲਾਤੀ ਸ ਇੱਛਾ ਕਰਕੇ ਜਿਹੜੇ ਕਲਪਣਾ ਹੁੰਦੀ ਸੀ ਸਾਰੇ ਨਾਸ਼ ਹੋ ਗਏ ਸਾਰੀ ਛੁੱਟ ਗਈ ਉਪਦੇਸ਼ ਜੇ ਦਿੱਤਾ ਸਤ ਸੋ ਸੁਣਿਆ ਸਿੱਖੀ ਕੰਨੇ ਜਿਹਨ ਸਤ ਕਾ ਭਾਣਾ ਮੰਨਿਆ ਤਿੰਨ ਚੜੀ ਚ ਵਗਣ ਬੰਨੇ ਕਦ ਕਦ ਨਾ ਸੁਣਿਆ ਬ੍ਰਹਮ ਦਾ ਸਤਿਗੁਰੂ ਦਾ ਇਥੇ ਪਰਮੇਸ਼ਰ ਦਾ ਹੀ ਸੀ ਅੱਛਾ ਨਾ ਸੁਣਿਆ ਜਿਹੜਾ ਉਹ ਸਤਿਗੁਰੂ ਦਾ ਥਰੂ ਸੁਣਿਆ ਹਾਂ ਸਤਿਗੁਰੂ ਦਾ ਉਪਦੇਸ਼ ਬਦ ਕੇ ਜਾਦੂ ਦੀ ਹੈ ਇਹ ਕੇ ਸੁਣ ਵੀ ਹੈ ਉਹ ਪਰਮੇਸ਼ਰ ਦੀ ਤ੍ਰੁਣੀ ਅਸੀਂ ਸਤਗੁਰ ਤੋਂ ਹੈ ਉਪਦੇਸ਼ ਹੈ ਦਾ ਹੈ ਬਿਲਕੁਲ ਸੁਣਦਾ ਸਭ ਨੇ ਲਿਆ ਬੰਦਿਆਂ ਜਿਹੜੇ ਉਹਦੀ ਵੱਖਰੀ ਗੱਲ ਹੈ ਜਿਨ੍ਹਾਂ ਨੇ ਬੰਦਿਆਂ ਉਹਨਾਂ ਤੇ ਚਮਕਣ ਵੱਲ ਚੜ ਗਿਆ ਉਹਦਾ ਚੌਗਣਾ ਬਦਲ ਗਿਆ ਹੋ ਗਿਆ ਪਰ ਇਹਨਾਂ ਨੇ ਕੇਵਲ ਸੁਣਿਆ ਬੰਦਿਆਂ ਦੀ ਉਹਨਾਂ ਦੇ ਚੌਗਣਾ ਵੱਲ ਨਹੀਂ ਚੜਿਆ ਇਹ ਜਿੰਨਾ ਘੱਟ ਜਿਹੜੇ ਉਹਨਾਂ ਘੱਟ ਬੁੱਧਨ ਨਾਲ ਗੱਲ ਬੰਢੀ ਏ ਤੇ ਪੂਰਾ ਭਰ ਦਿੰਦਣ ਦਾ ਥੜ ਪੂਰਾ ਮੰਨਣ ਦਾ ਬਣ ਲੈ ਇਹ ਚਾਲ ਨਿਰਾਲੀ ਗੁਰਮੁਖੀ ਗੁਰ ਸੁਣੀ ਮਨ ਭਿੰਨੇ ਗੁਰਬਖਸ਼ ਦੀ ਚਾਲ ਨਿਰਾਲੀ ਹੈ ਗੁਰ ਦੀ ਸੁਣ ਕੇ ਮਨ ਭਜ ਗਿਆ ਕਿਹ ਚਾਲ ਫਰਦਾਨ ਜੀ ਕੇ ਆਲ ਮਗਾੜੀ ਹੈ ਗੁਰ ਦੇਖਿਆ ਸੁਭੀਮਾਨ ਪਣ ਗੁਰ ਦੇਖਿਆ ਸੁਣ ਕੇ ਗੁਰ ਦੇ ਬਚਨ ਸੁਣ ਭਾਵ ਕੀ ਉਪਦੇਸ਼ ਜੋ ਪਰਮੇਸ਼ਰ ਦਾ ਉਹ ਸਤਿਗੁਰ ਨੇ ਜਦੋਂ ਆ ਕੇ ਦ੍ਰਿੜ ਕਰਾਇਆ ਉਹਦੇ ਨਾਲ ਫੇਰ ਮਨ ਭਿੱਜ ਗਿਆ ਹੈ ਜੀ ਠੀਕ ਹੈ ਜੀ